ਆਸਤੋ ਤੇ ਰਮਈਆ ਕੇ ਗੁਣ ਪ੍ਰਾਣੀ ਕਵਲ ਮੂਲ ਤੇ ਕਵਲ ਦਿਸਟਾ ਮੇ ਰਮਈਆ ਕੌਣ ਆ ਆ ਪ੍ਰਾਵੇ ਰਮਈਆ ਅਗ ਪ੍ਰਾਵਾ ਉਹ ਸੱਜ ਰਮਈਆ ਕਿਆ ਹੋਇਆ ਉਹ ਤੇਰੇ ਚ ਉਹਦਾ ਹੀ ਰਮਈਆ ਹੋਇਆ ਸਭ ਜਿਵੇਂ ਕਹਿੰਦਾ ਵੀ ਸਾਡਾ ਖਾਂਡਾ ਦੀ ਖੂਰ ਬਣੇ ਚ ਉਹਦੀ ਜੋਦਾ ਤੂੰ ਉਹਦਾ ਜਾਨਣਾ ਤੇਰੇ ਤੇ ਉਹਦਾ ਜਾਨਣਾ ਉਹ ਜਾਣਨੇ ਰਮਾਇਆ ਤੇਰੇ ਤੇ ਹੋਪਲਾ ਨਹੀਂ ਕੀ ਰਮਾਇਆ ਧੁੱਪ ਜੀ ਕੀ ਰਮਾਇਆ ਸੂਰਜਾ ਜਾਨਣ ਔਰ ਮਈਆ ਉਹ ਰਮਾਇਆ ਰਮਈਆ ਇਹ ਦੁਆਰਾ ਰਖਤਾ 9 ਰੁਪਇਆ ਰਖਤਾ ਸੀ ਪਹਿਲਾਂ ਰਮਈਆ ਜੇ ਕੋਈ ਚੇਤ ਪ੍ਰਾਣੀ ਰਮਈਆ ਆਰਾਮ ਬਿਉਸਰੂ ਉਹ ਰਾਮ ਨੂੰ ਰੁਪਇਆ ਕਹਿੰਦਾ ਰਮਈਆ ਕਹਿੰਦਾ ਆਵਰੇ ਪਰ ਹਾਂ ਆਵਰੇ ਸਰਬਤਰ ਰਮਈਆ ਕੇ ਗੁਣ ਚੇਤ ਪ੍ਰਾਨੀ ਰਮਈਆ ਤੋ ਉਹਦੇ ਗੁਣ ਦੇਗਾ ਉਹੇ ਜੇ ਗੁਣ ਜਾਣੀ ਦੇਣਾ ਤੇ ਜੇ ਤੇਰੇ ਚੋਹੇ ਜੇ ਗੁਣ ਹੋ ਜਾਣਾ ਫੇਰ ਉਹ ਤੂੰ ਤੂੰ ਆਨੂ ਵਿੱਚ ਜੰਬਾ ਲੇਂ ਤੂੰ ਉਹ ਹਾਂ ਸੁਭਾਅ ਵੀ ਹੋਊਗਾ ਆਪਣੇ ਸੁਭਾਅ ਦਾ ਆਦਮੀ ਹਮੇਸ਼ਾ ਚੰਬਾ ਲੇਂਦਾ ਜੇ ਬੱਚਾ ਇਹ ਜਾਈ ਹੋਵੇ ਜਾਇਆਦਾ ਪੇਵਾ ਭੂ ਉਸੇ ਸੁਭਾਤਾ ਹੋਵੇ ਭੂ ਮੱਟਾ ਦੇ ਭੂਏ ਕੋਈ ਨਹੀਂ ਨੂੰ ਕਹਿੰਦਾ ਕਿ ਬੈਹੁੱਤ ਨੂੰ ਸਾਉਂ ਉਹ ਤਾਂ ਉਹ ਖਤਰਾ ਹੋਵੇ ਵੀ ਗੱਡੀ ਕਦੇ ਖਤਾਨੇ ਸੁਣੇ ਦਿੱਕੂਗਾ ਡਰਦਾ ਹੋਵੇ ਉਹਦੇ ਸਭਾ ਤੇ ਡਰਦਾ ਹੋਵੇ ਤਾਂ ਉਹ ਆਪਣੀ ਪਰਿਵਾਰੀ ਦੀ ਡਰਦਾ ਹੈਗਾ ਵੀ ਇਹ ਅਜੋ ਹਾਂ ਹਲੋਡਾ ਜੋ ਨਾਲ ਉਹ ਰੁਦੀ ਰਉਦੀ ਹੈ ਬੇਮਤਲਬ ਇਸ ਕਰਕੇ ਰਬੀਆ ਕੇ ਕੋਣ ਜੇਤ ਪੜਾਣੀ ਕਬਰ ਮੂਰ ਤੇ ਕਬਰ ਦ੍ਰਿਸ਼ਟਾ ਨਹੀਂ ਉਹਦੇ ਆਏ ਕੋਣ ਪੈਦਾ ਕਰ ਲੈ ਉਹਦੀ ਮਰਦਾਨਤ ਤੂੰ ਸਿਰ ਮਰਦਾਨਾ ਹੈ ਹੀ ਨਹੀਂ ਕੋਈ ਉਹਨੂੰ ਨਹੀਂ ਨੀਂਦ ਆਉਂਦੀ ਤੈਨੂੰ ਨੀਂਦ ਆਉਂਦੀ ਆ ਇਹ ਨੀਂਦ ਟੜੀਆਂ ਸਤਗੁਰ ਜਾਗਤਾ ਹੈ ਗਿਓ ਨੀਂਦ ਆਉਣੀ ਮਰਨ ਨੀਂਦ ਆਉਣੀ ਵਰਨਾ ਤੈਨੂੰ ਨੀਂਦ ਆਉਂਦੀ ਆ ਜਦੋਂ ਨੀਂਦ ਆਉਣੇ ਵੱਧ ਹੋ ਗਈ ਗੁਰਮਖ ਦਾ ਜਾਨਤਾ ਹੈ ਨੀਂਦ ਨਾਲ ਸੋਇਆ ਆਪੇ ਜਾਗਣ ਤੋਂ ਬੜਕੋ ਪ੍ਰਖਾਰਾ ਆਪਣਾ ਕੱਪ ਟਾਰਗੇਟ ਤੇ ਜਾਵ ਦੇਖਣਾ ਰਹੇ ਉਹ ਆ ਨੀਂਦ ਸਹੀ ਟਾਰਗੇਟ ਤੇ ਕੀੜਾ ਅੜਕਦਾ ਕੇ ਗੋਣ ਕਮਈਆਲੇ ਕੋਣਸਾ ਹਲ ਕਰਨੇ ਨੇ ਬਸ ਇਹ ਟਾਰਗੇਟ ਇਹ ਟਾਰਗੇਟ ਤੋਂ ਐਧਰ ਉਧਰ ਉਹਨੂੰ ਹਵਾ ਸਮਾਨ ਵੀ ਉਹਦਾ ਧਿਆਨ ਨਾ ਜਾਵੇ ਇਸਰ ਬਹੁਤ ਚੋ ਇਹ ਹਾਂ ਕਬਰ ਮੂਲ ਕਬਰ ਮੂਲ ਤੇ ਕਬਰ ਨਿਦ੍ਰਸ਼ਾਨੀ ਕਿਸੇ ਵੇਲੇ ਤਾਂ ਮਈਆ ਮੂਲ ਹੁੰਦਾ ਬੂੜੇ ਹੁੰਦਾ ਆਪਾਂ ਜੋ ਉਹ ਤਤ ਰੂਪ ਦੇ ਅੰਦਰ ਕਦੇ ਦਸ਼ਮਾਨ ਵੀ ਹੋ ਜਾਂਦਾ ਦਸ਼ਮਾਨ ਕਦੋਂ ਹੁੰਦਾ ਜਦ ਅੰਤਰਾਵਾਜ ਆਉਂਦੀ ਹੈ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਉਹ ਦਸ਼ਮਾਨ ਹੁੰਦਾ ਜਦ ਬੂੜੇ ਬੂੜ ਕੇ ਦਸ਼ਮਾਨ ਹੁੰਦਾ ਬੂੜੇ ਦੇ ਨਾਲ ਦਸ਼ਮਾਨ ਕਿਵੇਂ ਲੁਗਾ ਕਵਨ ਦਾ ਅਰਥ ਹੈ ਕਿ ਕਦੋਂ ਕਿਸੇ ਕਵਨ ਕਿਸੇ ਵੇਲੇ ਕਿਸੇ ਵੇਲੇ ਦਾ ਰੂਪ ਝੁੱਦਾ ਉਹ ਰੂਪ ਨਹੀਂ ਪਕੜ ਜਾਂਦਾ ਫਿਰ ਅਦ੍ਰਿਸ਼ ਹੈ ਸ਼ਬਦ ਦੇ ਵਿੱਚ ਸੁਪਰਸ਼ ਤਾ ਉਹ ਸ਼ਬਦ ਰੂਪ ਵਿੱਚ ਹੈ ਨਾ ਫਿਰ ਤੁਰਕੀ ਬਾਣੀ ਹੁੰਦੀ ਆ ਜਿੱਨਾ ਜਰੂਰ ਰੂਪਾ ਨਾਮ ਦਾ ਕੋਈ ਤਨਛੇ ਨਹੀਂ ਕਰਦਾ ਤੁਰਕੀ ਬਾਣੀ ਆਈ ਬਾਉ ਬਾਣੀ ਨੂੰ ਕੋ ਜਾਨਵਰ ਕਿਤੇ ਬੈਠਾ ਹੈ ਆਵਾਜ਼ ਆਈ ਤੇ ਪਤਾ ਲੱਗਦਾ ਹੋਵੇਗਾ ਕੀ ਪਤਾ ਦਿਨੋ ਦਿਨ ਲੱਗਦਾ ਦ੍ਰਿਸ਼ ਨੂੰ ਜੋ ਅਦ੍ਰਿਸ਼ ਕੀ ਹੈ ਅਦ੍ਰਿਸ਼ ਹੈ ਉਹ ਚੀਜ਼ ਹੈ ਅਦ੍ਰਿਸ਼ ਹੈ ਤਾਂ ਬੋਲੇ ਤੇ ਪਤਾ ਨਹੀਂ ਕੀ ਹੋ ਮੂਲ ਤੇ ਕਵਨ ਦ੍ਰਿਸ਼ਾ ਨਹੀਂ ਜਿਹੜੇ ਵੇਲੇ ਮੂਲਾ ਮੂਲ ਤਾਂ ਅਦ੍ਰਿਸ਼ਾ ਉਹ ਤਾਂ ਤੇ ਕੰਨੀ ਕਦਾ ਜਦ ਸਾਡੇ ਨਾਲ ਉਹਦਾ ਸੰਪਰਕ ਜੁੜਦਾ ਹਾਜ਼ਰ ਹੈਗਾ ਉਹਦੇ ਬੋਲਦੇ ਤੇ ਪਤਾ ਲੱਗਦਾ ਹਾਜ਼ਰ ਹੈਗਾ ਬੋਲਦੇ ਤੇ ਪਤਾ ਲੱਗਦਾ ਹੈ ਅਧਰੇ ਪਤਾ ਕਿ ਬਿਨਾਂ ਦੱਸੇ ਪੁਰਾਣੇ ਦਾ ਹਬਲੇ ਪਤਾ ਕਿ ਦਿੰਦੇ ਦੱਸੋ ਉਹ ਕਿਹਾ ਹੈ ਹੈ ਦੇਸ਼ਮਾਨ ਵੀ ਹੈ ਤਾਂ ਕਹਿੰਦੇ ਆਪਰੇ ਉੱਧ ਤੇ ਕੁਛ ਕਹਿੰਦੇ ਆਪਣੇ ਰੱਬ ਨੂੰ ਜਾਣ ਕੇ ਕਹੇ ਆਪਣੇ ਰੱਬ ਨੂੰ ਦੂਏ ਦੇ ਨੂੰ ਨਹੀਂ ਉਹ ਮੇਰਾ ਮੇਰੇ ਅੰਦਰ ਦਾ ਤੇ ਆਪਣੇ ਅੰਦਰ ਵਾਲੇ ਰੱਬ ਨੂੰ ਜਾਣ ਕੇ ਆਪਣੇ ਰੱਬ ਨੂੰ ਜਾਣ ਕੇ ਅਸੀਂ ਬਹਿ ਜਾਈਏ ਸਿਖਾਦੇ ਗਏ ਪਤਾ ਸਾਹ ਨੂੰ ਹੈਗਾ ਮਕਾਦੇ ਭੁੱਲਣ ਨਹੀਂ ਆਏਗਾ ਕਦੇ ਨਹੀਂ ਹੋਵੇਗਾ ਕਦੇ ਭੁੱਲਣ ਨਹੀਂ ਆਏਗਾ ਕਦੇ ਭੁੱਲ ਜਾਂਦੇ ਹੈ ਸਿੱਧਾ ਆਏਗਾ بس ਆ ਗੱਲ ਕਰਦੀ ਜੇਵੇ ਲੋੜ ਹੁੰਦੀ ਹੈ ਫਿਰ ਉਹ ਮੈਨੂੰ ਲਿਆਉਂਦੇ ਕਿ ਧਰਮ ਨੂੰ ਜਾਣ ਕੇ ਆਏ ਬਈ ਜੇ ਰੌਣ ਰਾਮ ਵੈਦਨ ਨੇ ਉਹ ਤੁਹਾਨੂੰ ਕਹਿੰਨਾ ਕੁਦਰਤ ਮੈਂ ਕਹਿੰਦਾ ਆਪਣੇ ਅੱਲਾਹ ਨੂੰ ਜਾਣ ਕੇ ਕਹੇਗਾ ਕੁਝ ਕੁਝ ਕਹਿਣ ਦਾ ਕੁਝ ਕੁ ਹੋਵੇ ਤਾਂ ਸਾਰੀ ਨੇ ਆਪਣੇ ਅੰਦਰੋਂ ਗੱਲ ਕਹੀ ਜਾਂਦੀ ਪੜ ਜਾਂ ਬੋਲਦਾ ਹੈ ਜਾਂ ਫਿਰ ਕਹਿੰਦਾ ਨਾ ਬੋਲ ਕੇ ਅੰਤਰਾਤਮਿਕ ਅੰਤਰਾਤਮਿਕ ਬੋਲਦੀ ਹੈ ਉਹ ਬੁਲਾਉਂਦੀ ਹੈ ਫਿਰ ਸੱਚ ਜੀ ਬਰਾਬਰ ਕਰ ਮਨ ਜਾਦਵਰੋ ਕਹਿੰਦਾ ਤਾਂ ਕਿ ਭਾਈ ਗਲਤੀ ਇਹੀ ਸੀ ਉਹ ਫਿਰ ਕਾਹਦੇ ਕਹਦਾ ਵੀ ਉਹ ਨੰਪਲਾ ਕਹਿੰਦਾ ਰੁਕਾਇਦਾ ਆਪਣੀ ਗਲਤੀ ਮੰਨ ਲੈ ਸੇ ਜੇਤਾ ਉਹਦੀ ਗੱਲ ਸਰਾਬ ਮੰਨ ਲਵੇ ਤਾਂ ਇਹ ਸੱਚ ਬੋਲਦਾ ਸੱਚ ਬੋਲ ਪੈਂਦਾ ਸੱਚ ਬੋਲ ਪੈਂਦੇ ਨੂੰ ਮਾਫੀ ਦੀ ਸਾਰੇ ਕਿ ਤੇਰੀ ਜੇ ਸੱਚ ਬੋਲਦਾ ਵੀ ਹੁਣ ਇਹਦੇ ਵੈਅਡ ਕਰ ਤੋ ਕਈ ਵਾਰ ਬਥੀ ਕਈ ਵਾਰ ਰਹਿ ਸੱਚ ਬੋਲਨ ਦਾ ਇਹ ਲਾਭ ਦੇਖੋ ਜੇ ਰੱਬ ਵੀ ਮਾਫ ਹੋ ਜਾਂਦਾ ਪਰ ਜਦੋਂ ਕੋ ਬਣਾ ਕਾ ਸਾਬ ਬੋਲਦਾ ਸੱਚ ਉਹ ਵੀ ਬੋਲਦਾ ਹਨ ਜਿਨੇ ਤੂ ਸਾਜ ਸਵਾਰ ਸ਼ਿੰਗਾਰਿਆ ਗਰਬ ਗਰਬ ਅਗਨੀ ਵਿੱਚ ਉਹ ਕੋਉਨਾ ਲੋਆ ਬਲਲੋਡੂ ਰੂਪਾਇਆ ਉਹ ਰੂਤੂ ਹੀ ਦਾ ਨੂਰ ਜੋਤੇ ਹੈ ਤੂੰ ਜੋਤੇ ਨੂਰ ਕਿਹਾ ਤੋ ਜੋਤੇ ਨਹੀਂ ਉਹ ਖਲਾ ਦਾ ਦਾ ਕਿਉਂ ਹੁੰਦੀ ਹੈ ਸੂਰਜ ਦਾ ਨੂਰ ਕਿਉਂ ਹੁੰਦਾ ਹੈ ਗਰਮੀ ਬਹੁਤ ਸਰਦੀ ਵਿੱਚ ਗਰਮੀ ਵੀ ਦੂਰ ਹੈ ਅੱਛਾ ਜੇ ਬਹੁਤ ਠੰਡਾ ਹੋਵੇ ਜੇਨ ਤੂੰ ਸਾਜ ਸਵਾਰ ਸਰਾਇਆ ਫੇਰ ਤੈਨੂੰ ਸਾਜਿਆ ਫਿਰ ਤੇਰੀ ਅਕਲ ਸਵਾਰ ਤੇ ਰਹਾ ਹੁਣ ਅਪਣਾ ਖਾਲ ਬੁੱਧੀ ਤੇਰੀ ਅਪਣ ਦੁਲੇ ਜਨ ਬਰਾਉ ਨੂੰ ਤਾਂ ਜਿਆਦਾ ਸਮਾਰਿਆ ਆਣਾ ਤੂੰ ਸਰਾਇਆ ਸਰਾਇਆ ਗੋੜਵੇਂ ਨਾ ਕਰ ਕੋ ਅੱਛੀ ਤਿਕਾਪੂਆਣਾ ਆਪਣੇ ਸੁਵਲੋਡ ਕਰ ਲੈ ਆਪਣੇ ਅਕਰ ਕਰ ਲੈ ਨਾ ਸੋ ਕੇ ਗੱਲ ਨਾ ਛੇਰ ਬੁੱਟੇ ਜੇੜੇ ਚ ਕਰ ਲੈ ਨਾ ਹੋਣਾ ਚਾਹ ਕੋ ਅਗਰ ਜਿਆਦਾ ਨਾਰੇ ਗਰਭ ਅਗਨੀ ਨੇ ਜਿਹੜੀ ਬਣਾਈ ਤਾਂ ਤਲਵਾਰ ਬਣਾਈ ਉਹਨੇ ਤੈ ਜਾਲ ਬਣਾ ਲਿਆ ਉਹਨਾਂ ਨੇ ਕੀ ਬਣਾਇਆ ਜਾਂਦਾ ਵੀ ਜੁਣੀ ਭਾਂਜੇ ਤੋਂ ਕੁਝ ਬਣਾਦੇ ਆਂ ਪੁਰਾਣੇ ਜੀ ਬਣਾ ਉਹ ਤਾਂ ਉੱਥੇ ਹੀ ਨਾ ਜੈ ਜਿਹਾ ਗਰਭ ਅਗਨੀ ਨੇ ਜਿਹਨੀ ਉਭਾਰੇ ਗਰਭ ਅਗਨੀ ਵਿੱਚ ਜਿਹਦੇ ਉਭਾਰੇ ਦੇਖੋ ਗਰਭ ਅਗਨੀ ਸੀ ਮਾਂ ਦਾ ਟੋੜੇ ਦੇ ਵਿੱਚ ਨਾਲੇ ਮੇਤਾ ਣਾڑے ਵਰਗਾ ਇੱਕੋ ਜੀ ਹੀਟ ਹੈ ਇੱਕ ਪਾਸੇ ਖਾਤਾ ਹੈ ਮਾਜ ਹਜਮ ਹੋ ਜਾਂਦਾ ਹੈ ਤੇ ਪਾਸੇ ਨਵਾਂ ਬਣ ਜਾਂਦਾ ਕੋਟ ਰਸਦਾ ਰਹੋ ਬਲਬੀ ਡੋਡੀਓ ਘਰ ਬਗਨੇ ਜਿਹਨੇ ਵਾਜ ਕਿਉਂ ਬਈ ਹੁੰਦਾ ਇੱਕ ਹੁੰਦਾ ਜੋ ਆਪ ਕਿਥੇ ਇੱਕ ਕਗਨ ਧਾਰ ਰਹੀ ਹੈ ਉਹੀ ਅਗਨ ਧਾਰ ਰਹੀ ਹੈ ਉਹੀ ਅਗਨ ਬਣਾ ਰਹੀ ਹੈ ਉਹ ਵਾਰਿਆ ਉਥੇ ਤੈਨੂੰ ਕੋਹ ਨਹੀਂ ਵਾਰਿਆ ਇਹ ਖਾਤਾ ਜੀ ਤੈਨੂੰ ਬਚਾਇਆ ਉੱਥੇ ਉਹ ਤੋਂ ਉਦੋਂ ਤੂੰ ਉਹ ਵੀ ਸੜ ਜਾਂਦਾ ਉੱਥੇ ਪਰ ਜਿਆਦਾ ਆਤਮਾ ਨਿਕਲ ਜਾਂਦੀ ਆ ਜਾਂ ਜਦੇ ਸੜ ਜਾਂਦਾ ਉਹ ਤੈਨੂੰ ਬਚਾਉਣਾ ਤਾਂ ਉਹਨੂੰ ਥੋੜੇ ਬਚਾਉਂਦੇ ਤੇਰੇ ਕਰਕੇ ਬਚਾਇਆ ਉਹ ਨੂੰ ਥੋੜੇ ਬਚਾਉਣਾ ਕੋਈ ਆ ਕੇ ਉਹ ਤੈਨੂੰ ਹੈ ਤੈਨੂੰ ਵਾਰਿਆ ਉਹੜੀ ਵਾਰਿਆ ਫਿਰ ਉਹ ਰੋਇ ਕੋਈ ਉਹ ਦੀ ਜਰਮਣ ਨਹੀਂ ਉਹ ਹਜਮ ਹੋਣਾ ਉਹ ਦੀ ਜਰਮਣ ਨਹੀਂ ਉਲਟੀ ਦੇਖੋ ਮੇਤੇ ਵਾਲਾ ਹਜਮ ਹੋਣਾ ਤੇ ਜਰਮਣ ਨਹੀਂ ਹਾਂ ਜਿਹੜਾ ਉਹ ਜਹਿਰ ਜਰਮਣ ਨਹੀਂ ਇਕਦਮ ਉੱਥੇ ਵਰਤਮਾਨਾ ਤੇਰੀ ਜਰਮਣ ਨਹੀਂ ਕੱਲ ਵੀ ਇੱਥੇ ਖਤਰਨਾਕ ਹੈ ਉਧਰ ਵਰਤਮਾਨਾ ਹਜਮ ਹੋ ਕੇ ਖੱਡੇ ਮਾਸ ਦਾ ਇੱਧਰ ਜਰਮਣ ਜੀ ਅੱਠਾਂ ਘਟੇ ਚ ਛਿੱਟਿਵੜੀ ਗੱਲਾਂ ਦਾ ਕੀ ਕੁਝ ਐਂਟਾਰਾ ਕੀ ਨਾ ਬਣਾਇਆ ਬ੍ਰਿਕੀ ਲਾਂਦੇ ਹਾਂਜੀ ਬਾਹਰ ਦੇ ਉਸਤਾਦ tujhe pyare dood bhar jivan bhojan sukh dood baro wasta tujhe pyara dood dutra pyar se se pyare dood aho ਲਗੋ ਦੁੱਧ ਨਾਲ ਪਿਆਰ ਸਿੱਖਦੇ ਤਾਂ ਦੁੱਧੇ ਲੱਤੋ ਭੋਜਨ ਲੱਗਦਾ ਤੈਨੂੰ ਜੀ ਚੰਗੀ ਲੱਗੀ ਉਹ ਤੇ ਤੁਸੀਂ ਮੈਂ ਕਹਿੰਦਾ ਇਹਨੂੰ ਮੱਛਾ ਦੇ ਦੇ ਇਹਨੂੰ ਗੁੱਟ ਦੇ ਦੇ ਵੜ ਖਾ ਲੈ ਨਹੀਂ ਜੀ ਚਾਹੇ ਤੁਸੀਂ ਬਾਹਲਾ ਦੋ ਚਾਹੇ ਪਰ ਮਾਦਾ ਦਾ ਹਰ ਵਕਤ ਨਹੀਂ ਕਰ ਸਕਦਾ ਬਾਹ ਦੇ ਦੋ ਨਹੀਂ ਜਾ ਕਿਵੇਂ ਕਿਸੇ ਹੀ ਹੈ ਉਹ ਕਿਵੇਂ ਮਾਦਾ ਹੀ ਹੈ ਦੁੱਤਾ ਦੁੱਤੇ ਹੈ प्यारो दूद, प्यारो दूद तुझे प्यारे दूध तुझे प्यारे दूध सारी जिंदगी में आरे बाहर व्यवस्था तुझे प्यारे दूध वो दूध सारी जिंदगी प्यार रहे कदे मरदे तक नहीं कहना कि दूध तो मुझको mm -hmm. mm -hmm. दो वो गल इलाका भी कोई हमारी होगा डॉक्टर साहब वो ਪਰ ਜੋ ਬੰਦ ਭੋਜਨ ਸੁਖ ਸੁਧ ਕੇ ਪਰ ਜੋ ਬਣ ਆ ਗਿਆ ਫਿਰ ਹੋ ਠੇਸ ਬਣ ਕੇ ਤਰ੍ਹਾਂ ਤਰ੍ਹਾਂ ਸੁਣਣਾ ਬਿਚਾਈਦਾ ਕੀ ਚਾਹੀਦਾ ਸਦਾ ਦਾ ਅੰਜਰ ਮਾਣ ਲਾ ਕੇ ਭੋਜਨ ਮਾਣ ਲਾ ਕੇ ਉਹਨਾਂ ਦਾ ਸੁਪੈ ਗਿਆ ਉਦੀ ਸੋਚੀ ਹੋਗੀ ਤਾਂ ਬਿੰਦ ਤੇ ਆ ਉੱਪਰ 60 ਸੈਂਟ ਫਿਰ ਤੇਆ ਜਿਹੜੇ ਉੱਤੇ ਰਿਸ਼ਤੇਦਾਰ ਸਾਥ ਸੁਭਦੀ ਦੀ ਸੇਵਾ ਕਰਨੀ ਹੈ ਪਹਿਲਾਂ ਤੇ ਹਾਜ਼ਰ ਜੈਹ ਜਿਹੜੇ ਸਭ ਕੁਝ ਹੈਗਾ ਇੱਥੇ ਖਾਂਡੂ ਵੀ ਦਿੱਤਾ ਸੇਵਾ ਕਰਨੀ ਹੈ ਸੇਵਾ ਕਰਨੂ ਬੇਦਰ ਦਿੱਤੇ ਹੋਣੇ ਉੱਪਰ ਬੇਦਰ ਤੇ ਆ ਉੱਪਰ ਸਾਖ ਸ਼ੈਨ ਮੁੱਖ ਉਪਾਯੋ ਬੈਠ ਕੋ ਉੱਪਰ ਬੈਠੇ ਮੈਂ ਮੁੱਖ ਜਿਹਾ ਰਹੇ ਮੁੱਖ ਪਰੋ ਬੈਠੇ ਦੇ ਇਹ ਮੁੱਖ ਜਿਹਾ ਪਾਉਂਦੇ ਇੱਥੇ ਜਾਂਦੇ ਨੇ ਰੋਟੀ ਆ ਪਾਣੀ ਬੈਠਾ ਬਿਮਾਰ ਵੀ ਹੈ ਬੈਠੇ ਨੂੰ ਤਾਂ ਨਾਲ ਆ ਪੀਣ ਦੇ ਚੱਜਣਾ ਬੰਦੇ ਉਹ ਵੀ ਦਰੇ ਬੈਗਾ ਰਹੇ ਦੂਸਤ ਭਾਈ ਜਾਂ ਫਿਰ ਜੀ ਸਾਹ ਕਰਿਓ ਇਹ ਜੋ ਉਹ ਦੱਸੇ ਤੈਨੂੰ ਕੁਤਾ ਕੀ ਲੋਦਾ ਕਰਿਆ ਉਹ ਬਾ ਚਾਉਂਦੀ ਮਕੀਰ ਤੇ ਨਿਰਗੁਣ ਗੁਣ ਕੁਸੂ ਨੂੰ ਗੁਝੇ ਪਰ ਇਹ ਕਿੱਥੇ ਉਹਦੇ ਗੁਣ ਕੋਈ ਤਾਂ ਵਿਆਹ ਕੋ ਦਿੱਤਾ ਸਾਬਤ ਕੀ ਸੋ ਨਿਰਗੁਣ ਜਿਹੜਾ ਕਹਿ ਰਿਹਾ ਮੈਂ ਤਾਂ ਪਹਿਲਾਂ ਸਾਬਤ ਕੀ ਤਾ ਨਿਰਗੁਣ ਇਹ ਦੱਸ ਵੀ ਇਹ ਹੈਗਾ ਜਾਂ ਗਲਤ ਕਹਿ ਤਾ ਜੋ ਘਰਵਾਲੀ ਜੀ ਨੇ ਕਾ ਸਾਬਤ ਕੀਤਾ ये निर्गुण आ रहायाना तू दही हैगा एना गल्ला करके, दासे के करके सची सब वही दसरे भी हम चुके ऐ करके बोलनी सच्ची है खरे के शर्मा दादा यहां पर सही है पैना तो हम बताई देवे गल्ला की गल्ला सची कही है हां ये निर्गुण गुण पशु ना सूजे बक्स लेवो तो नाम की सींचे ਇਹ ਬਖਸ਼ਿਸ਼ ਹੋ ਜਾਇਆ ਕਿਰਪਾ ਹੋ ਜਾਏ ਹਜ਼ਰਤ ਇਹਦੇ ਖਾਣੇ ਦੀ ਕੋਈ ਗੱਲ ਪੈ ਜਾ ਕਿਸੇ ਵੇਲੇ ਤਾਂ ਫੇਰੇ ਸੁਣ ਜਾਂਦੀ ਏ ਦੀ ਤੁੰ। ਫੇਰੇ ਸੁਣਿਆਉਣ ਲੱਗ ਗੱਲ। ਫੇ ਦੁਬਾਰਾ ਦਰਪੰਦ। ਜਿੰਨਾਂ ਤਾਂ ਛੱਡਿਆ ਹੋਇਆ ਉਹਦੇ ਵਿੱਚੋਂ ਜੀ ਸਕਦੇ। ਇਹ ਕਾਰਨ ਤਾਂ ਐਵੇਂ ਲਧਿਆਣੀ ਇਹਦੇ ਛੱਡ ਕੇ ਸਭ ਜੋ ਜਿਹਨੇ ਪਿਛੇ ਭੱਜੇ ਫਿਰਦੇ ਨੇ ਉਹ ਤਾਂ ਸੇ ਨਵੇਂ ਪਰਿਪਰਾਇਆ ਜਮ ਦਾ ਗੰਡੂ ਮੇ ਲਗਾ ਸੇ ਨਵੇਂ ਕੋਈ ਪਰਿਪਰਾਇਆ ਸੋਤਿ ਸੰਪਤੀ ਬਲਤਾ ਬਨੋਰ ਛੋੜ ਗਏ ਨਾਨਕ ਸਿਝੇ ਜੇ ਬਖਸ਼ਿਜ ਹੋ ਜਾ ਤੇ ਫਿਰ ਫੱਟ ਜਿਹੜੀ ਟਾਂਡੀ ਹੁਣ ਕੀ ਹੋਈ ਆ ਸਾਡੇ ਨਾ ਜਾਦਾ ਉਹ ਰੀਗ ਬੁਆਇਆ ਸੀ ਸਿਰ ਰੂਤੀ ਹੁੜੀ ਆਉਣੀ ਸੋਝੀ ਸੋਝੀ ਆਜਵੇਂ ਵੀ ਗੱਲ ਕਰਤਾ ਈ ਤੂੰ ਘੋੜੀ ਭੋੜੇ ਤੈਨੂੰ ਵਿਚਾਰ ਕਰਨ ਲੱਗ ਜੀ ਛੱਡ ਜੀ ਕਿਰਪਾ ਨਾਲ ਹੁੰਦੀ ਹੈ ਤੂੰ ਕਹੀ ਬਕਸੀ ਤੇ ਬਕਸੀ ਵਰਾਈ تھی ਕੋਈ ਚੀਜ਼ ਨਹੀਂ ਆ ਜੇ ਤੂੰ ਉਹ ਵਿਚਾਰ ਕਰਨ ਲੱਗਿਆ ਬਕਸੀ ਹੋ ਗਈ ਜਿਹੜਾ ਸੁਣ ਕੇ ਵੀ ਨਾ ਆਇਆ ਬਕਸੀ ਅੱਜ ਜਉਦੀ ਆਪਣੀ ਹੋਈ ਜਾ ਰਹੀ ਬਸ ਦੌੜ ਆ ਗਈ ਪਹਿਲੇ ਸਾਡਾ ਬਰੇ ਚੀ ਲੜ ਲੈ